ਸ੍ਰਿਸ਼ਟੇ ਪਹਿਉ ਨ ਜਾਣੇ ਕੋਈ ਸ੍ਰਿਸ਼ਟਾ ਕਰੇ ਸੋ ਨੀਚੋ ਹੋਇ ਸ੍ਰਿਸ਼ਟੇ ਦਾ ਪਹਿਉ ਨ ਜਾਣੇ ਕੋਈ ਰਿਸ਼ਟੇ ਦਾ ਹੁਕਮ ਜਾਂਦਾ ਕਿਨੇ ਸਿੱਧੀ ਤੇ ਕਿੰਨ ਜੀ ਹੈ ਸਾਦੀ ਉਹਦਾ ਨਹੀਂ ਕੋਈ ਬਹਿਦ ਜਾਣੇ ਕੋਈ ਸ੍ਰਿਸ਼ਟਾ ਕਰੇ ਸੋ ਨੀਚੋ ਹੋਇ ਸੋ ਨੀਚੋ ਦਾ ਹੁਕਮ ਹੈ ਉਹ 겁ਨਾ ਤੇ ਕੋਈ ਨਹੀਂ ਜਾਂਦਾ ਜੋ ਕਰਦਾ ਫਟ ਹੋ ਜਾਂਦਾ ਇਹ ਗੀ ਸੰਪੇ ਕੋ ਈ ਛਰਤੇ ਆਈ ਹੈ ਸੰਪੇ ਪੁਰਬ ਲਿਖੇ ਕੀ ਪਾਈ ਹੈ ਕਪੇ ਕੋ ਈ ਹੈ ਅਈ ਸੰਪਤੀਆਂ ਸਭ ساری ਇਹਦੇ ਵਾਸਤੇ ਕਰਦਾ ਕੋਈ ਕੋਈ ਬਿਸ਼ਰੂ ਦਾ ਧਿਆਨ ਕਰਦਾ ਉਹਨੂੰ ਇਹ ਕਰ ਕੋਈ ਬਿਸ਼ਰੂਤ ਨਹੀਂ ਛੜਕਾਂ ਕੋਈ ਸਬਜੀ ਨਹੀਂ ਛੜਕਾਂ ਦਾ ਠੀਕ ਹੈ ਜੀ ਪਰ ਇਹ ਤਾਂ ਗੱਲ ਨਹੀਂ ਉੱਥੋਂ ਤਾਂ ਮਿਲਦਾ ਨਹੀਂ ਸੁਪਾ ਸੱਪ ਤਾਂ ਜਿਹੜਾ ਹੋਤੋਂ ਉਹ ਮਿਲਦਾ ਮਿਲਦਾ ਤੁਹਾਨੂੰ ਇਹਨਾਂ ਤੋਂ ਨਹੀਂ ਮਿਲਦਾ ਕੁਝ ਵੀ ਪਰ ਉਹ ਇਹ ਤਾਂ ਜੋ ਪੂਰਬ ਲਿਖਿਆ ਹੋਇਆ ਉਹੀ ਮਿਲਦਾ ਤੁਹਾਨੂੰ ਹੋਰ ਵੀ ਜਿਹੜਾ ਹੰਪੇ ਕਰਨ ਚੱਕਰ ਚੋਰ ਹੰਪੇ ਕਰਨ ਦਾ ਚੋਰ ਬਣਦੇ ਨੇ ਲੋਕ ਕਾਕਰੀ ਵੀ ਕਰਦੇ ਨੇ ਚੋਰੀ ਕਰਦੇ ਨੇ ਫਿਰ ਵੀ ਸੱਪੇਸ ਹੋਰ ਇਹ ਗੱਲ ਹੋਰ ਜਿਹੜਾ ਲਫਜ਼ ਲਿਖਿਆ ਹੋਰ ਨਹੀਂ ਜ਼ੋਰ ਚਾਹੀਦਾ ਉਹਨਾਂ ਚਾਹਤ ਚੋਰਾ ਜੋਰ ਜੋਰ ਕੋਈ ਜੋਰਾਵਰੀ ਨਾ ਕਹੇ ਦੀ ਜੱਦੀ ਕਰਕੇ ਕੇਸੋ ਖਿੱਚ ਕਰਕੇ ਸੰਪਤੀ ਲੈ ਸਕਦੇ ਕਿ ਕੈਸੋ ਪੋਰ ਬਲੇ ਖੇਦਾ ਪਾਈ ਹੈ ਇਹ ਤਾਂ ਪੰਕਤੀ ਆਦੀ ਇਹ ਤਾਂ ਹੋਰ ਲਭੀ ਆ ਸਕਦਾ ਜੋਰ ਹੀ ਆਊਗਾ ਅੱਛਾ ਉੱਪਰਲੀ ਬੰਦ ਦੀ ਵਗਿਆ ਹੋ ਜੂਗੀ ਨਹੀਂ ਅੱਛਾ ਇਹ ਸੰਪਤੀ ਸੰਪਤੀ ਆ ਜੀ ਨਾ ਕੀ ਬਣਦਾ ਜੀ ਸੰਪਤੀ ਸੰਪਤੀ ਉਹ ਰੁਪਈਆ ਜੀ ਬਿਨ ਸੱਚੇ ਨਹੀਂ ਦਰਗਾਹ ਮਾਨ ਹਰ ਟੋਟਾ ਨਿਦਾਨ ਇਹਨੇ ਹੋਰ ਨਾ ਲਿਖਦੇ ਨਾ ਵਿਨਦਾ ਬਰਮਾ ਬਿਸ਼ੂ ਕੱਟੇ ਜਾਂਦੇ ਤੇ ਇਹਨੇ ਜ਼ੋਰ ਦੀ ਜਗਾ ਹੋਰ ਲਿਖਤਾ ਤਾਂ ਕਿ ਤੋਂ ਵੀ ਮਿਲਦੇ ਨੇ ਇਹ ਸ਼ਕਤਾ ਬੜੀ ਰਹੇ ਅੱਛਾ ਕੱਟ ਕੇ ਲਿਆਏ ਤੇ ਉਹ ਜੁੱਤ ਦਾ ਪੂਰਪਨ ਪਾਈ ਹੈ ਕੀ ਗੇ ਇਥੇ ਨਾਲੇ ਲਫ਼ਜ਼ ਹੋਰ ਕਰਤਾ ਜ਼ੋਰ ਦੀ ਜਗ੍ਹਾ ਤਾਂ ਕਿ ਇਹ ਤੇ ਭਰਪੂਠਾ ਕੇ ਥੋੜਾ ਜਿਹਾ ਹਾਂਜੀ ਲਫ਼ਜ਼ ਹੈ ਸੰਪੇ ਜ਼ੋਰ ਹਾਂ ਆਦੇ ਬਾਰੇ ਕੀ ਹੈ ਬਿਨ ਸਾਕੇਤ ਕਰਗਾ ਬੋਲ ਆ ਦੇਖੋ ਅਗਲੀ ਅਗਲੀ ਪੰਕਤੀ বিনা ਸਾਕੇ ਨੇ ਕਰਗਾ ਬੋਲ ਸਕੇ ਤੇ ਬਿਨਾਂ ਲਗਾ ਜੀ ਦੀ ਹਰ ਦਾਸ ਦੀ ਵਿੱਚ ਛੁੱਟੇ ਦਾ ਦ ਜੇ ਕੋਈ ਹਰ ਦਾਸ ਕਿਲੂਗਾ ਛੁਟਕਾਰਾ ਉਹਦਾ ਹੀ ਹੈ ਆਹਰ ਛੁਟਕਾਰਾ ਹੋਦਾ ਜਿਹੜਾ ਹਰ ਦਾਸ ਕਿਲੂਗਾ ਮਨੋ ਛੁਟਕਾਰਾ ਹੈ ਦੀ